ਇਸ ਤੋਂ ਇਲਾਵਾ ਖਾਲਸਾ ਪੰਚਾਇਤ ਸਭਰਾ ਦੇ ਇੱਕ ਮੈਂਬਰ ਜਸਬੀਰ ਸਿੰਘ ਦੇ ਨਾਮ ਨਾਲ ਵੀ ਸਭਰਾ ਨੇ ਸੰਤ ਸ਼ਬਦ ਵਰਤਿਆ ਹੋਇਆ ਹੈ ਜਿਸ ਦੀ ਫੋਟੋ ਅਸੀਂ ਇੱਥੇ ਦੇ ਰਹੇ ਹਾਂ ਲਿਖ ਦਿ ਸਕੈਨਿੰਗ ਗੁਰਬਾਣੀ ਦੇ ਜੋ ਬਚਨ ਲਿਖੇ ਹਨ ਜਲਦੀ ਵਿੱਚ ਲਗਾ ਮਾਤਰਾ ਵੱਧ ਘੱਟ ਹੋ ਗਈਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗਦੇ ਹਾਂ ਵੱਲੋਂ ਖਾਲਸਾ ਪੰਚਾਇਤ ਪਿੰਡ ਸਭਰਾ ਸੰਤ ਜਸਬੀਰ ਸਿੰਘ ਭਾਈ ਬਲਦੇਵ ਸਿੰਘ ਭਾਈ ਜਰਨੈਲ ਸਿੰਘ ਭਾਈ ਸੁਖਦੇਵ ਸਿੰਘ ਭਾਈ ਸੁਖਵਿੰਦਰ ਸਿੰਘ ਜੇ ਸਭਰਾ ਇਹ ਕਹੇ ਕਿ ਇਸ ਦਾ ਨਾਮ ਹੀ ਸੰਤ ਜਸਬੀਰ ਸਿੰਘ ਹੈ ਉਹ ਵੀ ਗਲਤ ਹੈ ਕਿਉਂਕਿ ਦੂਸਰੇ ਥਾਂ ਸਭਰਾ ਨੇ ਖੁਦ ਹੀ ਇਸ ਨੂੰ ਭਾਈ ਜਸਬੀਰ ਸਿੰਘ ਲਿਖਿਆ ਹੋਇਆ ਹੈ ਸ਼ਾਇਦ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਵੇਗਾ ਇਸੇ ਤਰ੍ਹਾਂ ਸੰਤਾਂ ਦੇ ਕੌਤਕ ਭਾਗ ਪਹਿਲਾ ਪੰਨਾ 301 ਤੇ ਜਸਬੀਰ ਸਿੰਘ ਖਾਲਸਾ ਪੰਚਾਇਤ ਸਭਾ ਲਿਖਿਆ ਹੋਇਆ ਹੈ ਕੁਫਰਗੜ ਬਨਾਮ ਦਸਮ ਗ੍ਰੰਥ ਸੰਤਾਂ ਦੇ ਕੌਤਕ ਭਾਗ 6ਵੇਂ ਦੇ ਪੰਨਾ 71 ਤੇ ਲਿਖਦਾ ਹੈ ਵਿਚਾਰ ਇਹ ਲੋਕ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਸਾਬਤ ਕਰਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾਉਣ ਸਾਰਾ ਜ਼ੋਰ ਲਗਾ ਰਹੇ ਦੂਸਰੇ ਪਾਸੇ ਸੰਤਾਂ ਦੇ ਕੌਤਕ ਭਾਗ ਪਹਿਲਾ ਦੇ ਪੰਨਾ 63 ਤੇ ਆਪਣੇ ਵਿਚਾਰ ਦੀ ਪੁਸ਼ਟੀ ਲਈ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਪ੍ਰਮਾਣ ਦਿੰਦਾ ਹੈ ਏਕ ਚਿੱਤ ਜਿਹ ਇੱਕ ਛਿਨ ਤੇ ਆਇਓ ਕਾਲ ਫਾਸਕੈ ਵਿਚ ਨਾ ਆਇਓ ਚੌਪਈ ਦਸਵੀਂ आखन मीच रह बक की जिस लोगन एक प्रपंच दिखायो 33 सवैया सवैया पाचश दशमी इसी तरह ही गुरुबख्श सिंह काला अफगानी ने अपनी किताबों में जगह-जगह दशम ग्रंथ में से हवाले देते हैं जिस का विस्तार इस तरह है विपरण की रीज सजदा मार्ग भाग पहला पन्ना 20 49 40 41 265 270 ਤੇ ਪੰਨਾ ਵਿਪਰਨ ਕੀ ਰੀਤ ਸੱਚ ਦਾ ਮਾਰਗ ਭਾਗ ਦੂਜਾ ਪੰਨਾ 148 ਜਾਪ ਸਾਹਿਬ ਦਾ ਛੰਦ 471 ਤੇ 186 ਵਿਪਰਨ ਕੀ ਰੀਤ ਸੱਚ ਦਾ ਮਾਰਗ ਭਾਗ ਤੀਜਾ ਪੰਨਾ 68 69 85 ਜਾਪ ਸਾਹਿਬ ਦੇ ਸ਼ਬਦ ਹਜ਼ਾਰੇ ਦੇ ਸ਼ਬਦਾਂ ਵਿੱਚੋਂ ਵਿਪਰਨ ਰੀਤ ਸੱਚ ਦਾ ਮਾਰਗ ਭਾਗ ਚੌਥਾ ਪੰਨਾ 307 ਅਕਾਲ ਉਸਤਤ 3300 ਵਿੱਚੋਂ ਡਿਫਰੈਂਟ की ਰੀਤ ਤੋਂ ਸੱਚ ਦਾ ਮਾਰਗ ਭਾਗ 5 ਪੰਨਾ 144 ਪੰਨਾ 182 186 209 ਅਤੇ ਪੰਨਾ 305 ਭਾਗ 10ਵਾਂ 75 ਨਾਟਕ ਪੰਨਾ 7 42 58 55 73 81 ਅਤੇ 84 ਇਸ ਤਰ੍ਹਾਂ ਸਭਰਾਤ ਇਸ ਦਾ ਬਣਾਇਆ ਤ੍ਰੂ ਤਾਰਾ ਅਤੇ ਬੱਬਰ ਸ਼ੇਰ ਕਾਲਾ ਅਫਗਾਨਾ ਆਪਣਾ ਲਿਖਿਆ ਆਪ ਹੀ ਕੱਟ ਰਹੇ ਹਨ ਇਸੇ ਨੂੰ ਕੁਫਰਗੜ ਆਖੀ ਦਾ ਅਸੀਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਕਿਉਂਕਿ ਦਸਮ ਗ੍ਰੰਥ ਦੀ ਸ਼ਬਦਾਵਲੀ ਅਸ਼ਲੀਲ ਹੈ ਅਤੇ ਉਸ ਵਿੱਚ ਦਰਸਾਇਆ ਮਹਾਕਾਲ ਭਿਆਨਕ ਰੂਪ ਵਾਲਾ ਹੈ ਮਿੱਠ ਜੀ ਸੱਜਣ ਹਰ ਸੱਜਣ ਸਵਾਮੀ ਮੋਰਾ ਮਿੱਠ ਬੋਲੜੇ ਸਵਾਮੀ ਦੇ ਉਪਾਸਕਾਂ ਦੀ ਮਿੱਠੀ ਬੋਲੀ ਦੀ ਝਲਕ ਅਸੀਂ ਆਪਣੀ ਕਿਤਾਬ ਕਾਮਰੇੜੀ ਸਿੱਖਾਂ ਦੇ ਕੌਤਕ ਵਿੱਚ ਵੀ ਦਿੱਤੀ ਹੈ ਜੋ ਇਸ ਤਰ੍ਹਾਂ ਹੈ ਇਸ ਦੇ ਜਵਾਬ ਵਿੱਚ ਸੰਤਾਂ ਦੇ ਕੌਤਕ ਭਾਗ 6ਵੇਂ ਦੇ ਪੰਨਾ 10 ਤੇ ਇਸ ਦੇ ਸਪਸ਼ਟਿਕਰਨ ਵਿੱਚ ਲਿਖਦਾ ਹੈ ਪਾਠਕ ਹੈਰਾਨ रह ਜਾਣਗੇ ਕਿ ਮੇਰੀ ਜੋ ਲਿਖਤ ਇਹਨੇ ਇੱਥੇ ਛਾਪੀ ਹੈ ਇਸ ਤੋਂ ਪਹਿਲਾਂ ਖੰਡੇਧਾਰ ਦੇ ਲੇਖਾਂ ਵਿੱਚ ਕਾਲਾ ਫਗਾਨਾ ਜੀ ਨੂੰ ਹਰਾਮਜਾਦਾ ਕੁੱਤਾ ਕੁੱਤੇ ਨੇ ਕੁੱਤੀ ਕਰਤੂਤ ਕੀਤੀ ਐਸੀ ਸ਼ਬਦਾਵਲੀ ਇਹਨਾਂ ਨੇ ਪਹਿਲਾਂ ਆਪਣੀਆਂ ਲਿਖਤਾਂ ਵਿੱਚ ਵਰਤੀ ਹੈ ਸਪਸ਼ਟੀਕਰਨ ਜੇ ਮੇਰੀ ਕੋਈ ਲਿਖਤ ਇਸ ਤਰ੍ਹਾਂ ਖੰਡੇਧਾਰ ਵਿੱਚ ਛਪੀ ਹੁੰਦੀ ਤਾਂ ਇਸਨੇ ਉਸ ਸਕੈਨਿੰਗ ਕਰਕੇ ਲਗਾਉਣ ਵਿੱਚ ਦੇਰ ਨਹੀਂ ਸੀ ਲਗਾਉਣੀ ਫਿਰ ਇਸਨੇ ਜਿਸ ਖੰਡੇਧਾਰ ਵਿੱਚ ਮੇਰੀ ਲਿਖਤ ਦੇਖੀ ਹੈ ਉਸ ਦਾ ਅੰਕ ਨੰਬਰ ਮਹੀਨਾ ਜਾਂ ਪੰਨਾ ਕੋਈ ਨਹੀਂ ਦੱਸਿਆ ਖੰਡੇ ਧਾਰ ਵਿੱਚ ਮੇਰੇ ਜਿੰਨੇ ਲੇਖ ਆਏ ਓ ਕਾਲਾ ਅਫਗਾਨਾ ਦੇ ਕਾਲੇ ਲੇਖ ਦੇ ਨਾਮ ਵੇਟਰ ਛਪ ਚੁੱਕੀ ਕਿਤਾਬ ਵਿੱਚ ਮੌਜੂਦ ਹਨ ਇਸ ਦੇ ਪ੍ਰਕਾਸ਼ਕ ਭਾਈ ਸੁਖਦੇਵ ਸਿੰਘ ਗੁਰਮਤ ਪੁਸਤਕ ਭੰਡਾਰ ਦੁਕਾਨ ਨੰਬਰ 31 ਘੰਟਾ ਘਰ ਮਾਰਕੀਟ ਵਿੱਚ ਹਨ 75 ਨਾਟਕ ਤੇ ਕਾਲਾ ਅਫਗਾਨਾ ਦੇ ਕੁੱਤਰਕਾਂ ਦਾ ਜਵਾਬ ਪੰਨਾ 38 ਅੰਦੇ ਇਹਨਾਂ ਆਖਿਨ ਪੰਨਾ 110 ਇਸ ਤੋਂ ਇਲਾਵਾ ਇੱਕ ਲਿਖਤ ਕਾਲ ਅਫਗਾਨਾ ਦੇ ਨਾਮ ਖੁੱਲੀ ਚਿੱਠੀ 2003 ਵਿੱਚ ਖੰਡੇ ਧਾਰ ਵਿੱਚ ਛੱਬੀ ਸੀ ਇਹ ਮੇਰੀ ਕਿਤਾਬ ਸਭ ਦੁਸ਼ਟ ਚਖ ਮਾਰਾ ਵਿੱਚ ਪਈ ਹੈ ਦਾਸ ਪਾਠਕਾਂ ਨੂੰ ਬੇਨਤੀ ਕਰਦਾ ਹੈ ਕਿ ਇਨ੍ਹਾਂ ਲੇਖਾਂ ਵਿੱਚ ਜੇ ਦਾਸ ਨੇ ਕਿਤੇ ਵੀ ਕਾਲ ਅਫਗਾਨਾ ਬਾਰੇ ਅਜਿਹੀ ਸ਼ਬਦਾਵਲੀ ਵਰਤੀ ਹੋਵੇ ਤਾਂ ਜੋ ਦੰਦ ਸੰਗਤ ਲਾਏ ਭੁਗਤਣ ਲਈ ਤਿਆਰ ਹਾਂ ਨਹੀਂ ਫਿਰ ਇਸ ਕੁਫਰਗੜ ਦੇ ਮਾਲਕ ਮੂੰਹ ਤੋਂ ਧੰਨ ਗੁਰਗਨ ਸਾਹਿਬ ਕਹਿਣ ਵਾਲੇ ਸਿਕੁੰਦਰ ਸਿੰਘ ਸਭਰਾ ਨਾਲ ਇਸ ਦੇ ਆਪਣੇ ਲਿਖੇ ਅਨੁਸਾਰ ਵਰਤਣਾ ਚਾਹੀਦਾ ਹੈ ਇਹ बार-बार ਮੇਰੇ ਬਾਰੇ ਲਿਖਦਾ ਹੈ ਕਿ ਆਰ ਐਸ ਐਸ ਦਾ ਏਜੰਟ ਹੈ ਸੰਤਾਂ ਦਾ ਬੈ ਖਰੀਦ ਹੈ ਸੰਤਾਂ ਦੇ ਪੈਸਿਆਂ ਨਾਲ ਕਿਤਾਬ ਛਪੀ ਹੈ ਜੇ ਇਹਨਾਂ ਗੱਲਾਂ ਦਾ ਇਸ ਕੋਈ ਸਬੂਤ ਹੈ ਤਾਂ ਪੇਸ਼ ਕਰੇ ਵਰਨਾ ਇਸ ਕੁਫਰਗੜ ਬਾਰੇ ਸੰਗਤਾਂ ਨੂੰ ਆਪ ਫੈਸਲਾ ਕਰਨਾ ਚਾਹੀਦਾ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 93 ਤੇ ਇੰਜ ਦਰਜ ਹੈ ਅੱਗੇ ਲਿਖਦਾ ਹੈ ਮੈਂ ਤਰਕਸ਼ੀਲ ਬਣ ਗਿਆ ਕਾਮਰੇਡੀ ਸਿੱਖਾਂ ਦੇ ਕੌਤਕ ਪੰਨਾ 32 ਦੇਖੋ ਇਹ ਬਹਿਰੂਪੀਆ ਕਮਰ ਅਜੀਤ ਸਿੰਘ ਕਦੇ ਤਰਕਸ਼ੀਲ ਬਣ ਜਾਂਦਾ ਹੈ ਕਦੇ ਸਾਧਾ ਸੰਤਾਂ ਦਾ ਨਾਮ ਦਿੱਤਿਆਂ ਬਿਨਾ ਉਹਨਾਂ ਦੇ ਵਿਰੁੱਧ ਕਲਿਖਣ ਦਾ ਖੇਖਣ ਕਰਦਾ ਹੈ ਸਪਸ਼ਟੀਕਰਨ ਕਾਮਰੇਡੀ ਸਿੱਖਾਂ ਦੇ ਕੌਤਕਨਾਮ ਜੋ ਕਿਤਾਬ ਜੋ ਦਾਸ ਨੇ ਲਿਖੀ ਉਸ ਵਿੱਚ ਨਿਰਪੱਖ ਹੋ ਕੇ ਜਿੱਥੇ ਸੰਤ ਸਮਾਜ ਵਿੱਚ ਕਮਜ਼ੋਰੀਆਂ ਹਨ ਅਤੇ ਜੋ ਕਫਰਗਰ ਬੋਲ ਰਿਹਾ ਹੈ ਦੋਨਾਂ ਦੇ ਪਾਜੁਗੇੜੇ ਹਨ ਇਸ ਕਿਤਾਬ ਦੇ ਪੰਨਾ 32 ਤੇ ਇੱਕ ਲੇਖ ਹੈ ਜਿਸ ਦਾ ਸਰਲੇਖ ਹੈ ਕਿ ਮੈਂ ਤਰਕਸ਼ੀਲ ਬਣ ਗਿਆ ਅਤੇ ਪੰਨਾ ਨੰਬਰ 40 ਦੇ ਲੇਖ ਦਾ ਨਾਮ ਹੈ ਮੈਂ ਤਰਕਸ਼ੀਲ ਕਿਵੇਂ ਬਣਿਆ ਇਹਨਾਂ ਲੇਖਾਂ ਵਿੱਚ ਤਰਕਸ਼ੀਲ ਟੋਲੇ ਦੇ ਚੰਗੇ ਪਾਜੁ ਗਿਹੜੇ ਹਨ ਪਹਿਲਾ ਲੇਖ 6 ਪੰਨਿਆਂ ਦਾ ਹੈ ਦੂਸਰਾ ਲੇਖ 8 ਪੰਨਿਆਂ ਦਾ ਹੈ ਇਹਨਾਂ ਲੇਖਾਂ ਦੀ ਸਮਗਰੀ ਕਿਉਂਕਿ ਤਰਕਸ਼ੀਲ ਟੋਲੇ ਦੀ ਵਿਚਾਰਧਾਰਾ ਦੇ ਬਖੀਏ ਉਦੇੜ ਰਹੀ ਹੈ ਇਸ ਲਈ ਉਹ ਦੱਸਣ ਦੀ ਬਜਾਏ ਲੇਖਾਂ ਦੇ ਹੈਡਿੰਗ ਹੀ ਮੇਰੇ ਤੇ ਥਾਪ ਦਿੱਤੇ ਹਨ ਇਸ ਤੋਂ ਵੱਧ ਗਲਤ ਬਿਆਨੀ ਬੇਧਿਆਨੀ ਧੋਖੇਬਾਜ਼ੀ ਕੀ ਹੋ ਸਕਦੀ ਹੈ ਜੇ ਅਜੇਪੀ ਇਹ ਆਪਣੇ ਆਪ ਨੂੰ ਸੱਚਾ ਸੁੱਚਾ ਸਿੱਖ ਅਖਵਾਵੇ ਸਿਰ ਸਿਰਫ ਧਰਤੀ ਹੀ ਇਹਨਾਂ ਲਈ ਵੇਲ ਦੇਵੇ ਤਾਂ ਚੰਗਾ ਹੈ ਸੰਤਾਂ ਦੇ ਕੌਤਕ ਭਾਗ 6ਵਾਂ ਪੰਨਾ 108 ਤੇ ਇਸ ਤਰ੍ਹਾਂ ਲਿਖਿਆ ਹੈ ਅੱਗੇ ਲਿਖਦਾ ਹੈ ਕਿ ਮੈਂ ਸਹਿਜ ਪਾਠ ਕਰ ਰਿਹਾ ਸੀ ਇਹ ਸਮਝ ਪਈ ਕਿ ਕੋਈ ਸੰਤ ਮਹਾਪੁਰਸ਼ ਦੀ ਸੰਗਤ ਬਗੈਰ ਗੁਜ਼ਾਰਾ ਨਹੀਂ ਪਾਠ ਵਿੱਚ ਮਨ ਨਾ ਲੱਗੇ ਆਦੀ ਲਾਈਟ ਕਮਰੇ ਵਿੱਚ ਆ ਗਈ ਕੌਤਕ ਕਾਮਰੇ ਸਿੱਖਾਂ ਦੇ ਪੰਨਾ 143 ਸਪਸ਼ਟੀਕਰਨ ਅਤੇ ਉੱਤਰ ਪੰਜਾਬ ਪੁਲਿਸ ਦਾ ਸਪਾਟਾ ਉਪਰੋਂ ਤਰਕਸ਼ੀਲ ਇੱਕ ਕਰੇਲਾ ਤੇ ਇੱਕ ਨਿੰਮ ਚੜਿਆ ਜੇ ਝੂਠ ਨਾ ਬੋਲੇ ਤਾਂ ਹੋਰ ਕੌਣ ਬੋਲੂ ਮੇਰੀ ਲਿਖੀ ਕਿਤਾਬ ਕਾਮਰੇਡੀ ਸਿੱਖਾਂ ਦੇ ਕੌਤਕ ਦੇ ਪੰਨਾ 142 ਤੋਂ 144 ਤੱਕ ਇੱਕ ਲੇਖ ਹੈ ਮੇਰਾ ਬਾਬਾ ਮੇਰੇ ਘਰ ਹੈ ਇਸ ਵਿੱਚ ਮੈਂ ਸਵਰਗੀ ਸਰਦਾਰ ਦਲੀਪ ਸਿੰਘ ਛੀਨਾ ਰਿਟਾਇਰਡ ਆਈਜੀ ਪੁਲਿਸ ਪੈਪਸੂ ਦੀ ਹੱਡ ਬੀਤੀ ਸੱਚੀ ਘਟਨਾ ਲਿਖੀ ਹੈ ਕਿ ਮਨ ਦਾ ਸ਼ੰਕਾ ਨਿਵਰਤ ਕਰਨ ਲਈ ਸ੍ਰੀ ਗੁਰਗਨ ਸਾਹਿਬ ਦਾ ਅਸਵਾਰਾ ਪ੍ਰਗਟ ਹੋਇਆ ਅਤੇ ਮੈਨੂੰ ਯਕੀਨ ਆ ਗਿਆ ਕਿ ਸ੍ਰੀ ਗੁਰਗਨ ਸਾਹਿਬ ਜੀ ਤੋਂ ਵੱਡਾ ਸੰਤ ਕੋਈ ਨਹੀਂ ਇਸ ਲਈ ਹੁਣ ਕਿਸੇ ਬਾਬੇ ਕੋਲ ਨਹੀਂ ਜਾਂਦਾ ਮੇਰਾ ਬਾਬਾ ਮੇਰਾ ਘਰ ਹੈ